ਸਲੂਕ ਮਹੰਲਾ ਪੰਜਵਾਂ ਕੋਟ ਬਿਗਨ ਇਸ ਲਾਗ ਤੇ ਇਸ ਨੂੰ ਬਿਸਰੇ ਨਾਉ ਨਾਨਕ ਅਨ ਦਿਨ ਬਿਲਪਤੇ ਜਿਉ ਸੁਨਨੇ ਘਰ ਕਾਉ ਕਿਦਾਂ ਲੋਕ ਬਿਸਰ ਜਾਂਦੇ ਨੇ ਉਹਨਾਂ ਦੇ ਹੋ ਜਾਂਦੇ ਨੇ ਆਗੜ ਬਲਜਾਂ ਦੀ ਦਸ ਸੱਚ ਵਾਲੀ ਤਰ ਦੁੱਧਾ ਉਗਣ ਹੁੰਦਾ ਹੈ ਇਹਨਾਂ ਰਾਜੇ ਨੂੰ ਕਾਬੜ ਪਾਵੇ ਵਿਗਨੀ ਹਾਂਜੀ ਭਾਵੇਂ ਉਹ ਗਣ ਦੇ ਕਾਬੜ ਤੇ ਉਹ ਕਾਬੜ ਸੀ ਏਦਾਂ ਅਸੀਂ ਅਰਥ ਕਮਲ ਸਕਦੇ ਹਾਂ ਆਥਾਂ ਦੇ ਇਹ ਦਿੱਕਸ਼ਾ ਜਿਹੜੀ ਕਹੇ ਸੀ ਭਾਵਨਾ ਤੇ ਨਿਰਭਰ ਕਰਦੇ ਭਾਵਨਾ ਕੀ ਹੈ ਪਾਵਰ ਸੀ ਪਾਵਰ ਤੇ ਨਿਰਭਰ ਕਰਦੇ ਆਖਿਆ ਤੇ ਨਿਰਭਰ ਕਰਦੇ ਭਗਤਾਂ ਦਾ ਵਿੱਚ ਪਾਵਰ ਸੁਧ ਹਾਂਜੀ ਕਿ ਜੇ ਬਿਗਨ ਦਾ ਭਾਵ ਰੁਕਾਵਟ ਹੈ ਜੀ ਰੁਕਾਵਟ ਹੈਗੀ ਔਗਣ ਕਰਕੇ ਔਗਣ ਨੂੰ ਰੁਕਾਵਟ ਹੈ ਨਾ ਰੋਵੇ ਰੁਕਾਵਟ ਹੈ ਔਗਣ ਹਾਂ ਜੀ ਕਿਉਂਕਿ ਗੁਣ ਹੈ ਮਤਲਬ ਜੇ ਨਾਉ ਨਾ ਹੋਵੇ ਤਾਂ ਔਗਣ ਹੀ ਆਪਣੇ ਕੋਲ ਬਿਲਕੁਲ ਬਿਲਕੁਲ ਵਾਲਾ ਹਾਂ ਠੀਕ ਹੈ ਜੀ ਨਾਨਕ ਅਨ ਦਿਨ ਬਿਲਪਤੇ ਜੂ ਸੁਣਨੇ ਕਰ ਉਹ ਪ੍ਰਮਾਤਮਾ ਬਿਲਕੁਲ ਜਨਮਾਤ ਬਰਨਲਾਪ ਕਰਦੇ ਨੇ ਵਾਲਾ ਲੈ ਕੇ ਵਗੜੂ ਵਗੜੂ ਵਗੜੂ ਇਹ ਬਲਾਫੇ ਵਿਗਰਾਜੇ ਹੋਏ ਨੇ ਨਾਮ ਵਿਛੜਿਆ ਹੋਇਆ ਇਹਨੂੰ ਕੋਈ ਰਾਮ ਰਾਮ ਕਰਦਾ ਕੋਈ ਹਰੇ ਹਰੇ ਖੁਦਾ ਖੁਦਾ ਕਰਦਾ ਕੋਈ ਕੁਝ ਕਰਦਾ ਹੰਦਰ ਬਿਲਬਤੇ ਕਰ ਕਹੂੰ ਤੇ ਬੈਠ ਕੇ ਕੰਮ ਕੰਮ ਕਰਦਾ ਤਾ ਦਿਵਰਦੌਸ ਤਾ ਉੱਤਲ ਬੜ ਤੇਰ ਕੋਈ ਨਹੀਂ ਜੇ ਬਾਰ ਬਾਰ ਕਰਤਾ ਗੈਰ ਫਿਰ ਬਚਿਆ ਰਹਿ ਗਿਆ ਉਹ ਤਾਂ ਹੰਨ ਲਾ ਦੇ ਕੇ ਜੁੱਤਲਾ ਵੀਰ ਕਲੇ ਬੇਲੇ ਵੀ ਕੋਈ ਬਾਹਰ ਕੁਝ ਪਾਵੇ ਐਵੇਂ ਕਰਦੇ ਨੇ ਪਰ ਉਹਦੀ ਦਾ ਬਦਲ ਨਹੀਂ ਕਰਦੇ ਨੇ ਜਿਹੜਾ ਧਾਰਾ ਵਾਲਾ ਹਾਂਜੀ ਆ ਰਾਲੇ ਦੀ ਤਾਂ ਕਰਦੇ ਨੇ ਉਹਨਾਂ ਦੀ ਕਿਉਂ ਪੁੱਛੇ ਬਾਹਰ ਆ ਤੇ ਇਹੀ ਦਿੰਦੇ ਰਾਮ ਰਾਮ ਕਰਵਾ ਦਿੱਤੇ ਹੈ। ਪਾਰਗ੍ਰੋਗਰੂ ਕਰਨ ਦਿੱਤੇ ਹੈ। ਲੋਬ ਚਪੜਾ ਨਹੀਂ ਹੈ। ਇਹ ਦਿੱਤੇ ਹੈ। ਇਹ ਹੀ ਹੈ ਦਿੱਤੇ। ਵਿਦਿਆਪਨ ਕੀ ਹੈ। ਜਿਹੜਾ ਉਹ ਸ਼ਬਦ ਕੋਈ ਬੋਲੇ ਰਾਮ ਰਾਮ ਉਹ ਸਾਰਾ ਹੀ ਆ ਜਾਂਦਾ ਅਖੀਰੀ ਪੰਕਤੀ ਨੂੰ ਛੱਡ ਕੇ ਆ ਜਾਂਦਾ ਵਿੱਚ ਠੀਕ ਹੈ। ਉਹ ਸਾਰੇ ਬਿਲਪਦੇ ਹੀ ਕੋਈ ਨੋਂਦਾ ਕੋਈ ਕੱਪੜੇ ਪਾਉਂਦਾ ਕੋਈ ਹੱਜ ਬੋਲੇ ਹੋ ਬੋਲੇ ਤੁਸੀਂ ਕੋਈ ਰਾਏ ਕੁਝ ਠੀਕ ਹੈ ਪੰਕਤੀ ਜੇ ਤੋ ਨਾਨਕ ਜੀ ਨੇ ਹੁਕਮ ਪਛਾਤਾ ਉਸੇ ਤੋਂ ਤਾਂ ਭੁੱਲੇ ਹੋਏ ਨੇ ਉਹ ਹੀ ਤਾਂ ਵਿਸਰਿਆ ਹੋਇਆ ਉਹ ਪਛਾਤਾ ਸੂਝੇ ਗਾਰ ਕਾਮ ਬੋਲੀ ਜਾਂਦੈ ਠੀਕ ਹੈ ਕਰਤਾਲਾ ਦਾ ਕਰੇ ਆ ਅੱਛਾ ਜੀ ਉਹਨਾਂ ਦੀ ਸੁਣਦਾ ਹੀ ਨਹੀਂ ਇਹ ਦੁਖਾੜੀ ਨਹੀਂ ਲੈਣਦੇ ਹਾਂ ਠੀਕ ਹੈ ਜੀ ਇਹ ਤਾਂ ਨੰਡਿਆ ਕਰਦੇ ਨੇ ਘਰ ਵਾਲੇ ਤੁਨ੍ਹ ਦੇ ਜਿਹੜਾ ਸੁਣਨੇ ਘਰ ਦੇ ਵਿੱਚ ਤਾਂ ਅੰਦਰ ਫਿਰ ਕੋਈ ਹੈ ਹੀ ਇਹਨਾਂ ਵਾਸਤੇ ਸੁਣਨਾ ਪਰ ਕਦੇ ਹੈ ਹੀ ਨਹੀਂ ਜਦ ਕੋਈ ਬੋਲਦਾ ਨਹੀਂ ਆਪਰੇ ਸੁਣਨਾ ਜਿੱਥਾ ਆਏ ਕੋਈ ਬੋਲਦਾ ਨਹੀਂ ਹੈ ਜਿੱਥੇ ਇੱਥੇ ਸਾਰੇ ਚੁੱਪ ਨੇ ਨਾ ਅੰਦਰ ਘੱਟ ਭੜਿਆ ਹੋਇਆ ਸੁਣਨਾ ਕਰ। ਨਾ ਉਸ ਤੋਂ ਬੜੀ ਨੇ। ਵੀ ਸੁਣਨੇ ਤੋਂ ਪਾਪ ਲੈਣਾ ਵੀ ਕਰੇ ਹੈ ਤਾਂ ਸਹੀ ਪਰ ਉਹ ਬੋਲਦਾ ਨਹੀਂ ਕਿਉਂਕਿ ਸਾਨੂੰ ਬੁਲਾਉਣਾ ਨਹੀਂ ਆਉਂਦਾ। ਜੋ ਆਜ ਕੱਢ ਰਿਹਾ ਹੈ। ਰਾਮ ਕਹਿ ਰਿਹਾ ਉਹ। ਤੂੰ ਰਿਹਾ ਰਾਮ। ਪਰਮੇਸ਼ਰ ਨੂੰ ਨਾਮ ਕਰ। ਇਹ ਤਾਂ ਨਹੀਂ ਕਹਿਣਾ ਮੇਰਾ ਰਾਮ ਕੀ ਹਰਸੋ। ਰਾਮ ਦਾ ਬੇਤਰੀ ਅਸਰ ਹੈ ਬਾਹਰ ਸੁਣਾ ਦੇ। ਰਾਮਾ ਲੱਲ ਬਾੜੇ ਲਾਗ ਕਾ ਦਾ ਲੰਦੇ ਰਾਮ ਉੱਧਰ ਦੇ ਪਸੇ ਚਾਲੀ ਡੁੱਟ ਜਾ ਉਹਦੇ ਨੂੰ ਤਨੋ ਆਜ ਵਾਜ ਮਾਰਦਾ ਰਾਮ ਉੱਧਰ ਠੀਕ ਹੈ ਬੰਗ ਲੱਗੇ ਬਿਜਰ ਹੋਰ ਕੀ ਲੱਗੇ ਇਹ ਚ ਸੀ ਲੋਕਾਂ ਨੂੰ ਦਿਖਾਉਣ ਵਾਸਤੇ ਬਾਹਰ ਬੋਲਣ ਲੱਗ ਗਿਆ ਹਾਂ ਕਈ ਬਿਜਰ ਉੱਧਰ ਆ ਗਿਆ ਠੀਕ ਹੈ ਜੀ ਕਹ ਕੇ ਸਨੇ ਮਹੱਲਾ ਪੰਜਵਾਂ ਊਰੀ ਮਿਲਾਵਾ ਜਤੀ ਹੈ ਸਾਈ ਸੁਹਾਵੀ ਰੁੱਤ ਕੜੀ ਮਹਤਨਾ ਬਿਸਰੇ ਨਾਨਕ ਰਵੀਏ ਨਿਤ ਕਿਦਾਂ ਜਿਹੜਾ ਪਤਿਰ ਬੁਲਾਵਾ ਹੋ ਜਾਂਦਾ ਹੈ ਫਿਰ ਹੀ ਬੁਲਾਵਾ ਜਾਂਦੀ ਹੈ ਜਦ ਹੋ ਜਾਂਦਾ ਹਾਂ ਜਿਹਦੇ ਨੂੰ ਬੁਲਾਵਾ ਜਿਹਨੂੰ ਰਾਮ ਮਿਲ ਜਾਂਦਾ ਹੈ ਰਾਮ ਨਾਲ ਜੁੜ ਜਾਂਦਾ ਹੈ ਉਹ ਬੁਲਾਵਾ ਨਹੀਂ ਕਰਦਾ ਸਾਈ ਸੁਹਾਵੀ ਰੁੱਤ ਗੁਰੂ ਬਲਾਹ ਕਲਦੇ ਗੀਰੋ ਉਹ ਬਰ ਲਾਪਤਾ ਉਹਨੇ ਜਿਹੜਾ ਕਰਦਾ ਕੱਪੜਾ ਜਿਹੜਾ ਕੱਟਦਾ ਆ ਪਿੱਤਾ ਹੋਇਆ ਬੱਚਾ ਮਿਲਿਆ ਦੀ ਜਦ ਮੈਂ ਜਾਂਦਾ ਫਿਰ ਅੱਲਾਹ ਆਪਗਾਦਾ ਫਿਰ ਜੇ ਅੱਲਾਹ ਆਪ ਖੁਸ਼ੀਦਾ ਆ ਗਿਆ ਖੁਸ਼ੀਦਾ ਵੀ ਹੁੰਦਾ ਹੂੰ ਅਸੀਂ ਗੁਰਬਾਣੀ ਗਾਉਂਦੇ ਹੁੱਚੀ ਉਹ ਫਿਰ ਲਾਪਤਾ ਉਹ ਖੁਸ਼ੀਦਾ ਹੋਣੇ ਉਹ ਖੁਸ਼ੀਆਂ ਖੇੜਿਆ ਵਾਸਤੇ ਗਾਉਂਦੇ ਗੁਰਬਾਣੀ ਗੁਰਬਾਣੀ ਬੋਲਣਾ ਨਾ ਬੋਲਣਾ ਕਿਤੇ ਹਰ ਜਗਾਇਲ ਬੋਲਣਾ ਤੋਲਣਾ ਰਾਮ ਦਾ ਹੈ ਮੇ ਪੇਦਾ ਹੈ ਫਿਕਰ ਕਰਨ ਕੋਲਣਾ ਫਿਕਰ ਆਪ ਘਣਾ ਜਾਇਦਾ ਰਾਮ ਦਾ ਹੈ ਮੇ ਪੇਦਾ ਹੈ ਤਾਂ ਇੱਕ ਵਿਚਾਰ ਜੇ ਜਿਹੜੇ ਸਾਰੇ ਰਾਮ ਕਹਿੰਦੇ ਨੇ ਉਹ ਕਰ ਇੱਕ ਸੋਤ ਤਹਾਰ ਫਿਕਰਾਂ ਤੇ ਮਨ ਬੁੱਧੀ ਬਰ ਰੱਖ ਦਿੰਦਾ ਦੁਰੀਆਂ ਦਾ ਖਿਆਲ ਪੁੱਠੀ ਕਰ ਦਿੰਦਾ ਮਨ ਬੁੱਧੀ ਉਧੀਆਂ ਬਾਹਰ ਖੋਈ ਦੀ ਉਧਰ ਖੋਈ ਦਾ ਸਾਈ ਸੁਹਾਵੀ ਰਤ ਉਹ ਹੀ ਰੋਤੇ ਸੁਹਾਵੀ ਹੈ ਜਦ ਤੈਨੂੰ ਬਿਲਾਵਾ ਹੋ ਜਾ ਘੜੀ ਮੋਹਤ ਨਾ ਨਿਤ ਫਿਰ ਘੜੀ ਮੋਹਤ ਰਾਮ ਰਾਮ ਉੱਚੀ ਉੱਚੀ ਹੜਲ ਕੀ ਲੋੜ ਲਈ ਆ ਬਿਲਾਵਤੀ ਲੋੜ ਰਹੀ ਫਿਰ ਲੈ ਜੋ ਲੰਬ ਦੇਸਿਓ ਮਿਲ ਗਿਆ ਪਹਿਲਾਂ ਜੋ ਬਿੜਿਆ ਹੋਇਆ ਕੋ ਹੈ ਹੰ ਬਿਛੜੇ ਹੀ ਦੀ ਤੇ ਬਰਲਾਪਾ ਦਾ ਹੈ ਸਾਰੇ ਹੌਣ ਬਰਲਾਪਾ ਬਿੜਿਆ ਕਿਸੇ ਦੂਰ ਕਿ ਬਿੜ ਜਾਂਦਾ ਬਰਲਾਪ ਹਟ ਜਾਂਦਾ ਪੌੜੀ ਹਾਠ ਪੰਜਾਂ ਜੋੜੀ ਹੈ ਵੱਡੇ ਵੱਡੇ ਹੋਏ ਨੇ ਇੱਥੇ ਬਰਿਆਮ ਹੋਏ ਜੋਦੇ ਹੋਏ ਨੇ ਰਾਮਚੰਦਰ ਵਰਗੇ ਕ੍ਰਿਸ਼ਨ ਵਰਗੇ ਪੇੜਾ ਨਾ ਹੋੜੀ ਐ ਕਿਸੇ ਤੋਂ ਵੀ ਬੋਤ ਤੋਟਿਆ ਜਾ ਸਕਿਆ ਬਹੁਤ ਆ ਫਰਮਾਨ ਕਿਸੇ ਨੇ ਨਹੀਂ ਵਾਪਸ ਕੀਤਾ ਵੇਖਿਆ ਪੰਜਾਂ ਨੇ ਹੀ ਤਪਲ ਕੇ ਸੰਤੈਲ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜ ਪਾਵੇ ਉਥੇ ਉਗਣਿਓਗੜ ਆਗੇ ਤੇ ਜਬ ਇਸਰੀਆ ਸੀ ਦਸਾਲੀ ਸਾਲ ਉਗਣਿਓਗੜ ਆਗੇ ਸੀ ਇੱਥੇ ਗੁਰਾਂ ਦੀ ਬਹੁਤ ਜੋੜਲੀ ਹਾਠ ਪਿਛਲੀ ਫੌਜ ਹੈ ਪਿੱਛੇ ਹਟਣ ਇਹਨਾਂ ਨੂੰ ਕੁਝ ਕਹਿਦੀ ਹੋਈ ਸੀ ਬਹੁਤ ਸੀ ਤਫਾ ਹੋਈ ਕਾਲਪੁਰ ਖੈਨਾਂ ਨੂੰ ਉਹਦੀ ਉਹ ਤਾਂ ਫੌਜ ਹੈ ਪੰਜਾਂ ਜੋੜੀ ਹੈ ਪੰਜਾਂ ਦੇ ਜੋੜ ਰਾਜਾ ਘੜੀ ਜੀਤਾ ਜੋੜ ਕੇ ਕਾਲਪੁਰਖ ਦਾ ਸਰਬਦਾ ਬੋਲ ਕਾਲਪੁਰਖ ਦਾ ਬੋਲ ਬੋਲ ਕਾਲਪੁਰਖ ਉਹਦੇ ਆ ਜਾਵੇ ਹੁਣ ਪੜ ਲੈ ਉਹਦਾ ਨਾਂ ਤੁਹਾਡੇ ਨਾਲ ਹੀ ਪੜਨਾ ਕੋਈ ਰੇਵੀ ਹੋਜੂ ਆਹ ਸਿੱਟੇ ਲਈਦਾ ਹੁੰਦਾ ਨਾਲ ਨਾਲ ਤਾਂ ਪਰ ਇਹ ਜਿਹੜੇ ਵਿਰੋਧੀ ਨੇ ਡੁਪਲੀਕੇਟ ਰੌਂਗ ਪੜ੍ਹਨ ਜੇ ਬਖੇਜੀ ਬਾਟੋਲ ਵੇਰ ਮਾਰ ਮਾਰ ਕੇ ਜੱਲ ਨਾਲ ਜਾਂਦੇ ਹੋ ਕੋਈ ਜਾਣ ਲਿਆ ਉਹ ਜਿਉਂਦੇ ਜਾਉਂਦੇ ਸਰੀਰ ਜੰਗੋ ਕੇ ਇੱਥੇ ਸਰੀਰ ਤਾਂ ਰਖੜੇ ਵੀ ਨਾ ਹੋਈ ਪਰ ਭੇਜਣਾ ਤੁੰ ਨੂੰ ਜਿਉਂਦਿਆਂ ਨੂੰ ਲੋਕ ਅਵਗੂਣਾ ਦਸ ਨਾਰੀ ਔ ਧੂਤ ਦੇਨ ਚਮੋੜੀ ਐ ਜਿਣ ਜਿਣ ਲੈਣ ਰਲਾਏ ਲੋੜੀ ਹੈ ਗੋਦਿਆਂ ਚ ਕੁੱਤਾ ਦੇ ਵਿੱਚ ਐ ਗੋਡੇਲ ਚ ਐ ਇੱਦਾਂ ਜਗਾ ਸ਼ਕਤੀ ਬਣਦੇ ਨੇ ਅੱਛਾ ਐ ਜਿਹੜਾ ਉਤੜੇ ਕਿ ਗੋਡੀ ਐ ਹੋਈ ਆ ਜਦ ਸੇ ਛੁੱਟ ਕੇ ਕਹਿੰਦਾ ਫਿਰ ਕਬੀਰ ਕਹਿੰਦਾ ਬੰਨਾ ਜੋ ਖਿੱਚਲੀ ਚੱਖੇ ਤੇਜ ਤੇਜ ਖੱਟਿਆ ਦੋ ਸੇ ਬੰਨਾ ਖਿੱਚਿਆ ਗਿਆ ਸਾਰੇ ਬਿੱਚਿਆ ਗਿਆ ਇਹ ਤਾਂ ਪੀਲਾ ਪਾਣੀ ਸੁੱਕਦਾ ਸਾਰੇ ਸੁੱਕ ਜਾਂਦਾ ਉਹ ਦਰਖਤਾਂ ਦੇ ਵਿਚਾਲਾ ਵੀ ਸੁੱਕ ਜਾਂਦਾ ਦਰਖਤ ਵੀ ਸੁੱਕ ਜਾਂਦੇ ਇਹਨਾਂ ਕੇ ਲੈਂਡ ਰਲਾਏ ਇਹੋ ਇਹਨਾਂ ਨੂੰ ਲੋੜ ਕਰਦੀ ਆਪਣੇ ਚੇਲੇ ਵਧਾਈਏ ਆਪ ਪ੍ਰਚਾਰ ਕਰਕੇ ਨਾ ਇਹਦੇ ਨੂੰ ਵਧਾਓ ਆਪਣੇ ਚੇਲੇ ਵਧਾਓ ਨਹੀਂ ਨਾ ਹੋ ਜਾਏਗਾ ਹੋ ਹੋ ਜਾਏਗਾ ਦੀ ਕੋ ਜ਼ਰੂਰ ਕਰੀਏ ਜਿਣ ਦਾ ਭਾਵ ਹੈ ਜਿੱਤ ਕੇ ਜੇ ਜਿੱਤ ਲਏ ਤੇ ਉਹ ਹੀਰਾ ਨੇ ਚੇਲੇ ਬਣਦੇ ਨੇ ਨਾ ਤਾਂ ਸੱਚ ਇਹਨਾਂ ਨੂੰ ਪਤਾ ਜਿੱਤਣ ਵਾਲਿਆਂ ਨੂੰ ਨਾ ਸੱਚ ਹਾਰਨ ਵਾਲਿਆਂ ਨੂੰ ਜਿੱਤਣ ਵਾਲਿਆਂ ਨੂੰ ਆਪ ਜਾਇ ਗੁੜਕੇ ਹੋ ਬਿਜਾਸ਼ ਪਰਬਤ ਹੈ ਜੀ ਆਪ ਗੁੜਿਆ ਜੀ ਰਾਤਰੀ ਨਿਹੜਬੇ ਦਰਸ਼ਪ ਕਰਕੇ ਆਏ ਜੀ ਗੁੜਿਆ ਹੋਵੇ ਵੇਈਂ ਦੀ ਕਹਿੰਦੇ ਉੱਤੇ ਕੁਝ ਆਇਤੀ ਨੁਟਰੀਆ ਮਕਾਲ ਨੇ ਵੀ ਕਹਿੰਦੇ ਦਾ ਕੁਝ ਇਹਦਾ ਸੱਚੀ ਬੱਤ ਦੇ ਗਿਆ ਵੀ ਦੱਸੋ ਇਹ ਕਿਹਦੀ ਮੱਤੋਂ ਕੀ ਮਿਲਦਾ ਗੁਰਮੱਤੋਂ ਸੁਭਾਅ ਦੱਸੋ ਕਿਹਦੀ ਮੱਤੋਂ ਕੀ ਮਿਲਦਾ ਬੇਟਾ ਸੱਚੀ ਬੱਤ ਕੋਈ ਸਾਦ ਕੋਈ ਮਿਲਿਆ ਨਹੀਂ ਤੇ ਫਰਾਂਦੀ ਮੱਤੋਂ ਮਿਲਦਾ ਨਹੀਂ ਤੇ ਸ਼ੁਗਲੋ ਸਾਨੂੰ ਕਹਤੂਗਾ ਕਿ ਦੱਸ ਕਿਹੜਾ ਤੂੰ ਦਿਖਾ ਪ੍ਰਾਇਗੁਣ ਇਨ ਕਹਿ ਵਾਸ ਕਿਨੇ ਮੋੜੀ ਹੈ ਪਰਮ ਕੋਟ ਮਾਇਆ ਖਾਈ ਕਹੋ ਕਿਤਬਿ ਤੋੜੀਐ ਤੈਨੂੰ ਕੋਈ ਇਹਨਾਂ ਦੇ ਸਕਦੇ ਨੇ ਜਨਮ ਦੇ ਸਕਦੇ ਨੇ ਪਾਲਣਾ ਕਰ ਸਕਦੇ ਨੇ ਬਹਾਰ ਨੇ ਨੇ ਤੈਗੋ ਪਰਬਤੋ ਬਾਲ ਨਹੀਂ ਗਏ ਪਰਬਤ ਦੀ ਖਾਈ ਦੀ ਟੁੱਟੀ ਐ ਉਤੇ ਇਹ ਕਿਤਬਿ ਤੋੜੀਐ ਇਹ ਖਾਈ ਕਿਵੇਂ ਕੋਟ ਤੇ ਵਰ ਖਾਈ ਤੀਜੀ ਖਾਈ ਦੇ ਵਿੱਚ ਨੇ ਹੈ ਤੀਜੀ ਖਾਈ ਦੀ ਪਾਰ ਕਰ ਸਕਦੇ ਜਿੱਦਿਆਂ ਵੀ ਪਾਰ ਕਰ ਹੈ ਹਾਂਜੀ ਕੋਈ ਤੇ ਬੇਦੀ ਤੋੜੀ ਹੈ ਹਾਂ ਦੱਸੋ ਦਿੱਤੀ ਦੱਸੋ ਪਰਮਤੂ ਚਾਹੋਗੇ ਮੈਂ कि यदि गुर पूरा आराद बिकम दल फोड़ी है हां ते आगे दिन रात कर रहा कर जोड़ी है गुर पूरा भी आराधना करोगे येला बिकम डाला ਇੱਕ ਦੂਰੇ ਪਿੱਛੇ ਲੋਕਾਂ ਲੱਗ ਜਾਂਦੇ ਨੇ ਤੇ ਇਹ ਬੋਲੂਗਾ ਬੇਟੀ ਇਹਦੀ ਹੋ ਜੂਗੀ ਜੇ ਮੈਂ ਬੋਲ ਪੈ ਬੇਟੀ ਮੇਰੀ ਹੋ ਤੇ ਸਵਾਲ ਤਾਂ ਕੋਈ ਦੇ ਰਾਤ ਰਹਾ ਕਰ ਜੋੜੀਏ ਗਿਆ ਸਾਰੇ ਬੋਲ ਤੋਂ ਹੌਂਕਣ ਜਿੱਤਨੇ ਤੇ ਤੇ ਬੜੀ ਟੁੱਟ ਗਈ ਹਵਸਾਂਦਰ ਤੋਂ ਪਾਰ ਹੋ ਗਿਆ ਉਹ ਤੇ ਸਾਡੇ ਦੇ ਨਾਲ ਤਰ੍ਹਾਂ ਹੀ ਖੜੀ ਜਿਹੜਾ ਇਹ ਵਿਧੀ ਸਮਝਾ ਦੇਣਾ ਮੈਂ ਕਦੇ ਨਾਲ ਤੋਂ ਇਲਾਤ ਆ ਕੇ ਖੜਾ ਰਹੂਗੀ ਜਿੱਦੀ ਤਾਂ ਕੋਈ ਆਖੀ ਗੁਰਬਾਣੀ ਦੀ ਵਿਧੀ ਐ ਜਿਹੜੀ ਸਮਝਾ ਦੇ ਕੋਈ ਤੇ ਛੁੱਟਣ ਵਿਧੀ ਐ ਗੁਰਬਾਣੀ ਹੁਣ ਛੁੱਟ ਕੇ ਜਿੰਨੀਆਂ ਮੁਤਾਲਾਂ ਰਿਜ਼ੋਲਵ ਵਾਲੀ ਵਿਧੀ ਚਲਦੀ ਹੈ ਤੀਜੀ ਖਾਈ ਸ਼ਰਨਤੀਆਂ ਨੇ ਫੇਰ ਦੀ ਬੋਈਏ ਫੇਰ ਕਾਲੀ ਨੇ ਤੇ ਖਕੂਟੇ ਨੂੰ ਬਹੁਤ ਕੁਝ ਖਾਉਂ ਪਿਆ ਨੁਕਸ ਕਰੋ। پاگل ਹਾਂ ਤੇ ਅੱਗੇ ਦਿਨ ਰਾਤ ਰਹਾ ਕਰ ਜੋੜੀਏ। ਕਿਉਂਕਿ ਜਦੋਂ ਅਰਥ ਇੱਧਰ ਹੁੰਨੇ ਆ ਉਹ ਕਹਿੰਦੇ ਮੇਰਾ ਦਿਲ ਕਰਦਾ ਕਿ ਵੈਰੀਆਂ ਤੋਂ ਬਚਣ ਲਈ ਮੈਂ ਉਸ ਪੂਰੇ ਗੁਰ ਅਗੇ ਦਿਨ ਰਾਤ ਹੱਥ ਜੋੜ ਕੇ ਖੜੋਤਾ ਰਹਾ। ਪਰ ਉਹ ਝਟਕੇ ਦੇ ਬਿਨਾਂ ਪਰ ਪਿਛਾਂ ਚਿਰਦਾ ਪਰ ਉਹ ਵੀ ਬੇਇੱਜ਼ਤੀ ਕਰੇ ਤੇ ਵੀ ਪਰ ਪਿਛੇ ਹੀ ਚਿਰਦਾ ਵੇਖੇ ਕਿਨੇ ਕਰਦੀਆਂ ਤੈਨੂੰ ਨੇ ਕਿਸੇ ਨੇ ਪਾਤੇ ਕਰਦੇ ਅਰਥ ਹਮੇਸ਼ਾ ਹੱਥ ਕਰਦੇ ਆ ਉੱਥੇ ਬਹੁਤ ਭੇਦ ਹੈ ਜੀ ਜੇ ਜੀ ਮਨ ਚਿੱਤ ਨੂੰ ਜੋੜ ਕੇ ਬਿਲਕੁਲ ਬਿਲਕੁਲ ਆਲੇ ਮਨ ਉਹ ਇਕੱਜ ਆਈ ਇਹ ਲੋ ਪੈਦੇ ਦੇ ਉਹਨਾਂ ਦੇ ਘਰ ਜੋੜ ਕੇ ਅੱਗੇ ਜੋੜਦੇ ਨੇ ਜਿੰਨੀ ਆਦਮ ਜਾਣਦੇ ਪਰਮਾਤਮ ਸੋਈ ਇਹ ਤਾਂ ਪਰਮਾਤਮਾ ਆਪ ਬਣ ਲੱਗਦਾ ਹੱਥ ਕੀ ਦੇ ਅੱਗੇ ਜੋੜਦੇ ਨੇ ਕੋਈ ਵੱਡੀ ਤਾਂ ਕੋਈ ਤਸਵੀਰ ਹੋ ਦੀ ਨਾ ਅੱਗੇ ਕਹਿੰਦੇ ਪਤਾ ਇਹਨਾਂ ਨੂੰ ਕੱਖ ਦੀ ਪਤਾ ਇਹ ਸਾਬਤ ਹੈ ਕਿ ਬਦਵਾਨਾਂ ਸਖ ਦੀ ਪਤਾਗੁਰ ਵਾਲੀ ਵਾਰ ਹੈ। ਕੇ ਸਮਾਤ ਨਹੀਂ ਤੂਗ। ਜਿਹੜਾ ਪੂਤੀ ਮੋਦੇ ਰੋਜਾ ਕੇ ਹੱਥ ਜੋੜਦੇ ਨੇ ਹੱਥ ਜੋੜ ਕੇ ਜੀਏ ਦੇ। ਅੱਜ ਦੀ ਦੁਆ ਦੀ ਅਠਾਈ ਇਸ਼ਾਰਾ ਕਰਦਾ ਉਹ ਹੱਥ ਜੋੜੋ। ਪਰ ਪੂਰਾ ਗੁਰਮੀ ਦੱਸਦੇ ਕੌਣ ਹੈ ਨਾ ਮੈਂ ਪੂਰੇ ਗੁਰ ਅੱਗੇ ਦਿਨ ਰਾਤ ਹੱਥ ਜੋੜ ਕੇ ਖੜਾ ਰਹਾ। ਫਿਰ ਸੌਵਾ ਨਾ ਮੈਂ ਰੋਟੀ ਨਾ ਖਾਵਾਂ ਇਹ ਕੰਮ ਕਿਵੇਂ ਕਰਾਂਗਾ? ਠੀਕ ਹੈ ਜੀ ਉਹਨਾਂ ਨੂੰ ਸਮਝ ਨਹੀਂ ਆਈ ਗੱਲ ਵੀ ਇਹ ਅੰਦਰਲੇ ਸਰੀਰ ਦੀ ਗੱਲ ਹੈ ਅੰਦਰਲੇ ਮਨ ਔਰ ਚਿੱਤ ਨੂੰ ਜੋੜ ਕੇ ਰੱਖਣਾ ਹਮੇਸ਼ਾ ਕੋਈ ਜੀ